अस्तु दी जय परसार शक्ति अमृत खाएं इस सागर को रख मन में जय प्रसाद क्षतीय प्रदेशा की कृपा से क्षतीय प्रदेशा न आने का उक्त में खाता वे कृपा बूढ़ा सारा जलाना जलाना पिछाओदा। पिछाओदा न खाणला खादा गौड़ खाता, खाता मान ਜਿਹੜਾ ਖਾਦਾ ਤਾਂ ਨਹੀਂ ਹੱਦਾ ਜਿਹੜਾ ਜੀਵਾ ਸਰੀਰ ਨਾਲ ਜੁੜਿਆ ਉਹੀ ਖਾਦਾ ਅਸੋ ਜਿਹੜਾ ਸਰੀਰ ਨਾਲ ਜੁੜਿਆ ਉਹ ਨਹੀਂ ਗਿਆ ਤਕੋ ਮਾਇਆ ਦੇ ਵਿੱਚ ਤੋ ਤੋਂ ਹੁਣ ਤੋਂ ਪਹਿਲਾਂ ਗੱਲ ਹੁੰਦੀ ਸੀ ਜਿਹੜਾ ਬੰਨਾ ਹੈ ਇਹ ਕੁੜਿਆ ਦਾ ਇਹਦੀਆਂ ਵੈਰਾਈਟੀਆਂ ਨੇ ਮਾਣ ਵੱਖਰੀ ਵੱਖਰੀ ਕਿਸਮ ਦੀਆਂ ਨੇ ਸਾਰੇ ਜਿੰਨੀ ਕੋਈ ਵੈਰਾਈਟੀ ਫਿਰ ਕਰਕੇ ਕਿਹ ਹਰੀ ਹੈ ਹਰੀ ਕੋਈ ਵੈਰਾਈਟੀ ਹੈ ਉਹ ਹਰੀ ਹੋਵੇਗਾ ਤਾਂ ਸਤਿਆਰਾ ਹੋ ਜਿੱਦੋਂ ਤੋਂ ਹੋ ਜਰੂਰ ਹੈ ਪਰ ਹੈ ਸਤਿਆਰਾ ਉਹ ਤਾਂ ਕਹਾਂ ਉਹ ਵਿੱਚ ਸਤਿਆਰ ਕੂੜਿਆ ਰਹੇ ਜੇ ਜਰਾ ਹੁਣ ਉਹ ਆ ਵੀ ਗੁੜਿਆਰਾ ਕਿ ਹੋਮ ਵਿੱਚ ਹੈ ਕਈ ਕਦੇ ਗੱਲ ਹੋਰ ਆ ਲਿਗਦੀ ਜਾਂ ਜਾਂਦੀ ਹੈ ਕਿਤੇ ਕਿਤੇ ਫਿਰ ਦੁਬਾਰਾ ਫੇ ਕੱਢੀ ਜਾਂਦੀ ਹੈ ਉਹਦੇ ਨੂੰ ਭਾਈ ਨਾ ਨਹੀਂ ਕਹਾਂਦਾ ਵੀ ਅਸੀਂ ਭਾਈ ਕਰ ਲਿਆ ਇਹਦੇ ਹੱਥੇ ਬੰਨ੍ਹੇ ਦੇ ਇਹਦਾ ਵਿੱਚੋਂ ਕੋਈ ਨਾ ਨਿਕਲਿਆ ਜਾਂਦਾ ਇਹ ਆ ਵਿਚਾਰ ਤਾਂ ਕਰਕੇ ਵਿਚਾਰ ਨੂੰ ਲਿਖਿਆ ਦੀ ਜਾਂਦਾ ਜੋ ਵਿਚਾਰ ਹੈ ਲਿਖਿਆ ਜਾਂ ਗਿਆ ਵਿਚਾਰ ਬੰਦ ਹੋ ਗਿਆ ਜੋ ਜਿ ਵਿਚਾਰ ਕੇ ਲਿਖਦਾ ਵਿਚਾਰ ਖੜ ਪੀ ਹੁੰਦਾ ਹੈ ਗਾ ਨਹੀਂ ਵਿਚਾਰ ਸਕਦਾ ਜੇ ਗਾ ਵਿਚਾਰਾਂ ਕੋ ਉਹ ਬੋਲਦੇ ਲਿਖਤ ਵਿੱਚ ਰੂ ਪੜ੍ਹਨੀ ਕੋ ਭਾਵਨਾਤਮਕ ਤਰੀਕੇ ਨਾਲ ਜੇ ਦੀ ਗੱਲ ਕੀਤੀ ਜਾਂ ਸਕਦੀ ਹੈ ਜਿਹੜੇ ਅਰਥਾਜਿਕ ਕਰਬੀ ਜਾਣੇ ਨੇ ਉਹ ਤੋਂ ਗਾਂ ਵੀ ਅਸੂਰਦੇ ਨੇ ਪਾਵਰਥਾਂ ਜਿਹਨੇ ਅਸੀਂ ਕਰਦੇ ਨੇ ਉਹ ਜ ਹੋਰ ਗਾਂ ਕਰਨ ਦੀ ਵੀ ਗੁਜਾਇਸ ਦਿੱਤੀ ਪਾਵਰਥਾਂ ਪਾਵਰਥਾਂ ਦੀ ਕੋਈ ਹੱਦ ਨਹੀਂ ਹੁੰਦੀ ਪਾਵਰਥਾਂ ਦੀ ਹੱਦ ਹੁੰਦੀ ਹੈ ਨਹੀਂ ਹੁੰਦੀ ਛੇ ਅਸੀਂ ਨੂੰ ਲਿਖ ਕੇ ਹੱਦ ਕਿਵੇਂ ਬਣਨ ਹੈ ਜੀ ਠੀਕ ਹੈ ਜੀ ਅਗੇ ਸਭ ਕੁਝ ਉਹ ਤਾਂ ਹੱਥ ਮੇਂ ਗਈ ਲਿਖਿਆ ਗਿਆ ਇੱਕ ਵਾਰ ਪਾਵਰ ਤੇ ਕੋਈ ਹੱਦ ਨਹੀਂ ਉੱਚੇ ਤੇ ਉੱਚਾ ਭਗਵੰਤ ਦਾ ਪਰ ਖਤਮ ਹੋ ਗਿਆ ਹੋ ਉੱਚੇ ਤੇ ਉੱਚਾ ਜੜਾ ਉਹਦਾ ਗੋਣਾ ਤਾਂ ਖਤਮ ਹੋ ਲਿਖਿਆ ਹੁੰਦਾ ਪਾਵਰ ਤੇ ਇੱਕ ਵਾਰ ਤਰੀ ਨਹੀਂ ਹੋਇਆ ਜੀ ਕਦੇ ਪਾਵਰ ਤੋਂ ਹੁੰਦੇ ਦੇ ਠੀਕ जयप्रसाद शक्ति उम्र बसाए तेज सागर को रखबानवा जयप्रसाद छतीया पर खायें छतीया पर तो माजाबी अंतर वाली की वैरायटी दी है हरीबी वैरायटी ओदी कृपा नाल सारे फर्क छूट जिए सारे जिए सारीयां जुड़ने जो हुई <laughs> ਕਿਹੜਾ ਕਰਤਾ ਹੈ ਉਹ ਇਸ ਕੋ ਬਚਾਉਣਾ ਉਹਦੀਆਂ ਵੈਰਾਈਟੀਆਂ ਦੀ ਕਰਦੇ ਚਿਰਸੇ ਦੀਆਂ ਵੈਰਾਈਟੀਆਂ ਨੇ ਮਾਂ ਦੀਆਂ ਵੈਰਾਈਟੀਆਂ ਉਹ ਚਿਰਸੇ ਦੀਆਂ ਮਾਂ ਦੇ ਉਹ ਕੀਤਾ ਹੋਇਆ ਉਹਨਾਂ ਨੇ ਪੈਦਾ ਨਹੀਂ ਤਾਂ ਇਹ ਕਹਿੰਦੇ ਉਹਦੀ ਵੈਰਾਈਟੀ ਸਾਰੀ ਅੰਤਰਾਧਨ ਸਾਰਿਆਂ ਹੁੰਦੀ ਹੈ ਵੈਰਾਈਟੇ ਦੋ ਹੀ ਹੁੰਦੀ ਲਗਭਗ ਇਹਦੇ ਨਾਲ ਸਬੰਧ ਨਾ ਨਾ ਜੀ ਕਿਹਦੇ ਸੇ ਜੀ ਉਹ ਮੰਗਵਾ ਦੇਣ ਮਲਟੀ ਵੈਰਾਈਟੀਆਂ ਆ ਗਿਆ ਨਾ ਵੈਰਾਈਟੀਆਂ ਨਾ ਕਰਕੇ ਗਿਆਨ ਕਰਕੇ ਵੀ ਵੈਰਾਈਟੀਆਂ ਨੇ ਕਰਕੇ ਵੀ ਵੈਰਾਈਟੀਆਂ ਇਹਦੇ ਕਿਸੇ ਲੋਭ ਜਾਂਦਾ ਇਹਦੇ ਚਾਰ ਉਹ ਚ ਕੋਈ ਹੋ ਉਹਦੇ ਚ ਕੋਈ ਆ ਹੋਣਾ ਚਾਰਨ ਚਾਰਨ ਕੋਈ ਚੀਜ਼ ਘਟੇ ਕੋਈ ਚੀਜ਼ ਵਾਧਾ ਵੈਰਟੀਆਂ ਨਹੀਂ ਵੜੀਆਂ ਉਹ ਨਹੀਂ ਵੜੀਆਂ ਵੈਰਟੀਆਂ ਹੌਲਦੀ ਹੌਂਸਾ ਕਰ ਦਲੀ ਜਾਂ ਛੱਡੀ ਪਰ ਹੌਨ ਆਪਲਾ ਵਿਰੋਧ ਪੈਦਾ ਕਰਦੀ ਹੈ ਉਹਦੇ ਸੁਭਾਅ ਚ ਸੱਚ ਆਪਲਾ ਵਿਰੋਧ ਪੈਦਾ ਦੀ ਗੱਲ ਹੈ ਹੋਰ ਕੁਝ ਹੌਮੈਂ ਆਵਨ ਨਾਲ ਸੁਣਦਾ ਕੋ ਕਰਦਾ ਵੀ ਹਾਂ ਹੈ ਤਾਂ ਸੱਚ ਪਰ ਮਜ਼ਬੂਰੀ ਹੈ ਨਾ ਮਜ਼ਬੂਰੀ ਉਹ ਫੈਸਲਾ ਕਰਦਾ ਅੰਦਲਾ ਉਹ ਹੀ ਨਹੀਂ ਮੰਨਦਾ ਕਿ ਉਹਦਾ ਮੰਨ ਵੀ ਮੰਦਾ ਦਾ ਲਿਕੋਈ ਰੋਜ਼ ਹੀ ਹੈ ਗੱਲਾਂ ਸਰੀਰ ਦੀ ਜ਼ਿੰਮੇਵਾਰੀ ਉਹਦੀ ਨਹੀਂ ਸਰੀਰ بھول ਗਿਆ ਸਰੀਰ ਕਿਤਾਬੀ ਹੋਰ दो नहीं ਐ ਅਸੀਂ दो ਮਿੰਟ ਦੀ ਬੈਠਿਆ ਅਸੀਂ ਦੋ ਧਿਆਨ ਹੋਰ ਇੱਕ ਵਾਰਸੇ ਪਾਸੇ ਧਿਆਨ ਹੈ ਇੱਕ ਵਾਰਸੇ ਵਾਰ ਧਿਆਨ ਅਸਨ ਦੇ ਵਿੱਚ ਇੰਦਰ ਜਿਆਦਾ ਦੇ ਦੁਨ ਮਾਇਆ ਧਿਆਨ ਨੂੰ ਦੇਰ ਨਹੀਂ ਲੋੜੀ ਸੀ ਮਾਇਆ ਦੀ ਚੱਤਾਂ ਨੂੰ ਲੋੜ ਨਹੀਂ ਸੀ ਤੇ ਕਿੰਨਾ ਹੋਰ ਚਿੱਤਾਂ ਪਾਰ ਲਈ ਇਹ ਉਹਦੀ ਗੱਤੀ ਹੈ ਕਿ ਮੈਂ ਨਾ ਕੀਤਾ ਕਿਤੇ ਐ ਨਾ ਹੋ ਜਵੇ ਪਾਲ ਨਹੀਂ ਵੱਡੀ ਕਰ ਲਈ ਪਾਲ ਨਹੀਂ ਅੰਦੇ ਦਾ ਵੱਡਾ ਕਰ ਲੈ ਪਾਲ ਦੀ ਜਿੰਦਾ ਬਧਾ ਲਈ ਇਹ ਬੰਦ ਕਰੋ ਚਲੂ ਚਿੰਤਾ ਮੰਨ ਕਰ ਚਿੰਤਾ ਉਹ ਜਨਵਾ ਚਿੰਤਾ ਨਹੀਂ ਆਇਆ ਤੇ ਆਇਆ ਹੋਂ ਦੇ ਨਾਲ ਚਿੰਤਾ ਆ ਗਈ ਉਹਦੇ ਨਾਲ ਚਿੰਤਾ ਜਰੂਰ ਆਊਗੀ ਨਨਤਰਾ ਓਮੇ ਗੰਗਾ ਇਹ ਹਉ ਹਉ ਤੱਕ ਜੰਤਾ ਉਹ ਨੀਰਾੜੀ ਰੂੜ ਉਹ ਚਾਰਾਂ ਨੇ ਰਾੜ ਲਿਆ ਜਿੰਤਾ ਉਸੇ ਨੂੰ ਆਪਾਂ ਕਹਿੰਦਾ ਵੀ ਅੰਦਰਿਆ ਜੰਤਾ ਬਹੁਤ ਆ ਫਿਕਰ ਬੋਲ ਕੇ ਆ ਤੇ ਅੰਦਰੇ ਹੁੰਦਾ ਹਾਂਜੀ ਜੇ ਪ੍ਰਸਾਦ ਸੱਤੀ ਅੰਮ੍ਰਿਤ ਖਾਏ ਤੇ ਸ਼ਾਕਰ ਕੋ ਰਖਮਨ ਇੱਕ ਹੋ ਜਾਣਾ ਕਹਦੇ ਦੋ ਹੋ ਜਾਣਾ ਇੱਥੇ ਬੜਾ ਉਹ ਭਾਵੇਂ ਨਾ ਆਪਾ ਤੇ ਕਹਿੰਦੇ ਕਿ ਬਾਹਰ ਦੇ ਕਿਉਂ ਜਾਣੀ ਇੱਥੇ ਆ ਕੇ ਐਿੱਥੇ ਕੱਢ ਲਓ ਤੇ ਜੀ ਬਾਹਰ ਦੇ ਟਿਟੇ ਲਈ ਜਾਂਦੀ ਆ ਕੇ ਜਦ ਇੱਕ ਦੁਆ ਦੇ ਇੱਕ ਕੇ ਕਰੇ ਹੈ ਇੱਕ ਕਹਿੰਦੇ ਦੋ ਕਹਿਣੇ ਪੈ ਜਾਣ ਜੇ ਕਹਿਣ ਸੁਣਨ ਕੋ ਦੂਜਾ ਜਦ ਕਹਿਣਾ ਉੱਥੇ ਭੜਮ ਖੜਾ ਹੋ ਜਾਂਦਾ ਦੂਜੇ ਟਾਈਮ ਨਾਲ ਨਹੀਂ ਕਰ ਸਰ ਦੂਜਾ ਮਨੇ ਬਣਾ ਉਹ ਵੀ ਜਿਹੜੇ ਲਿਖਾੜਾ ਕਰੀ ਜਾਂਦੀ ਵੀ ਕਿਤੇ ਦੋਹਾਂ ਚੀਜ਼ ਤੇ ਲਿਖਾੜਾ ਕਰੀ ਜਾਂਦੀ। ਅਜੇ ਜਦੋਂ ਸੋਨੇ ਨੂੰ ਉਸ ਦਿਨ ਕਹਤਾ ਵੀ ਜੇ ਇਹਨੂੰ ਮੰਨ ਇੱਕ ਬਾਹਰਲਾ ਇੱਕ ਅੰਦਰਲਾ। ਅੰਦਰਲੇ ਜੇ ਇਹਨੂੰ ਮੁਕਤੀ ਜਾਈ ਹੈ। ਅੰਦਰਲੇ ਜੀ ਦਾ ਬੋਝ ਗਿਆਨ ਹੈ। ਕੋਈ ਗਿਆਨ ਦੀ ਕਬੀ ਹੋਈ। ਬਾਹਲੇ ਨੂੰ ਰਸ਼ਨ ਜਾਈਦਾ ਛੱਤੀ ਕੁਰਾਸ਼ੰਦਾ ਵੀ ਫੇਕੜਾ ਰਾਸ਼ੰਦਾ ਤਾਂ ਉਸੋ ਕਹਿਦਾ ਇਨਾ ਪਾੜ ਲਿਆ ਕਿ ਅਦਲੇ ਵਾਲਾ ਫੇਕੜਾ ਚੱਕੀ ਗਈ ਗਿਆ ਕਿ ਦੁਨੀਆਂ ਦਾ ਚੱਕਿਆ ਹੋਇਆ ਜਦੋਂ ਅਦਲੇ ਤੇ ਫੇਕੜੀ ਕੱਲ ਚਲਦੀਏ ਸੁਣ ਲੈ ਜੇ ਪੈ ਜਾਂਦਾ ਫਿਰ ਬਾਹਲਾ ਕਟਾਉਣਾ ਪੈਂਦਾ ਬਾਹਲਾ ਕਟਾਏ ਮਨਾ ਅਦਲੇ ਦੀ ਪੂਰਤੀ ਨਹੀਂ ਹੋਣੀ ਬਾਲੀ ਨਾ ਸੁਖ ਸੁਖਦਾ ਹੋਵਾਂਗਾ ਤਿਆਰ ਕਰਨਾ ਪੈਂਦਾ ਨਾ ਕਰੇ ਤਾਂ ਫਿਰ ਉਹ ਚਿੰਤਾ ਦੀ ਹੁੰਦੀ ਜੇ ਬਗਾਇਰ ਚਿੰਤਾ ਤੋਂ ਸੁਖਦਾ ਹੋਣਾ ਨਹੀਂ ਉਹ ਲੈ ਲੋ ਜਿਹੜੀ ਚਿੰਤਾ ਤੋਂ ਮਿਲਦੀ ਹੈ ਉਹਨੂੰ ਖਾਡਵਾ ਲਓ ਬਗਾਇਰ ਚਿੰਤਾ ਤੋਂ ਜਿੰਨਾ ਕੋਈ ਜੁੱਤੇ ਖਾ ਲੋ ਜੇ ਤੇ ਚਿੰਤਾ ਘੜੀ ਹੋ ਕੇ ਕਹਾਦੇ ਵੀ ਇਹਦੇ ਬਿਨਾਂ ਸਾਧੂ ਪਰ ਪਰ ਚਿੰਤਾ ਅਨਕਾਰਵਾੜ ਨਹੀਂ ਚਿੰਤਾ ਕਰ ਬੜੀ ਹੋਰ ਖਰਾਬ ਕਰੋ ਇਹ ਜੀਜ ਮੈਨਾਂ ਸਰਜੂ ਠੀਕ ਹੈ ਸੁਖਦਾ ਮੈਨਾਂ ਸਰਜੂ વાડી ਮੋਟੀ ਤੋ ਘਟ ਲਾਂਗੇ ਉਹ ਚੰਗਾ ਹੈ ਜਿਹੜੀ ਚਿੰਤਾ ਹੈਗੀ ਆ ਉਹ ਮਨ ਨੂੰ ਦੁੱਖ ਜਿਹੜੇ ਦੂ ਭਾਲਣ ਦੁੱਖ ਤਾਂ ਬਾਲੇ ਜਿਹੜੇ ਨੂੰ ਆਊਗਾ ਚਿੰਤਾ ਬੰਦ ਹੋ ਜਾੜੀ ਓਹ ਯਾਦਾ ਖਤਰਾ ਨਾ ਕਰ وہ اور ان ڈیزیزیاں اور ڈیپریشن اور بی یو اور بیماریاں ہو رہی ہیں શરીر میں بیماریاں میرادا لیے یہ اس طرح کے چنتا کا بڑھنا باہری سہدا کوئی خاص نہیں ہے جبڑکی لے لو نہیں ملتی تب چنتا دی قیمت ਉਹ ਫਿਰ ਪੈਸੇ ਵੀ ਚਾਹੀਦੇ ਨੇ ਜਦੋਂ ਖਾਂਕ ਪਾਕਿਸਤਾਨ ਵਿੱਚ ਉਹ ਉਹ ਜੀ ਉਹ ਤਾਂ ਉਹ ਜਿੰਦਗੀ ਦਾ ਫਿਰ ਉਹਦਾ ਮਸ਼ੀਨ ਵੱਢ ਗਏ ਫਿਰ ਉਹ ਸੋਚਦੇ ਨੇ ਕਿ ਆਈ ਜਿਦਗੇ ਰਹੀ ਖਾਈ ਜਾਣਾ ਖਾਈ ਜਾਣਾ ਭੱਜੇ ਖਰੀ ਜਾਣ ਉਹ ਉੱਥੋਂ ਡਿਪਰੈਸ਼ਨ ਹੋ ਗਿਆ ਅਸੀਂ ਆਖਰ ਖਟਿਆ ਕੀ ਝਟ ਗਿਆ ਥੜੀ ਜਿਹਾ ਕੁਝ ਉਹ ਜੇ ਕਾ ਛੱਡ ਗਏ ਤਾਂ ਬਚੇ ਰਹੇ ਨੇ ਆ ਜਿਹੜੀ ਚਿੰਤਾ ਹਰ ਵਕਤ ਦੀ ਚਲੋ ਬਈ ਇਹਨਾ ਟਾਈਮ ਹੋ ਗਿਆ ਘੜੀ ਰੱਖੀ ਜਾਨੇ ਕੋਈ ਕੁਝ ਕਰੀ ਜਾਨੇ ਬੇਤਾ ਨਾ ਕਰਦਾ ਡਿਪਰੈਸ਼ਨ ਕਰਦਾ ਸਾਜੀ ਜੇ ਪ੍ਰਸਾਦ ਸੁਗੰਦਰ ਤੁਨ ਲਾਵੇ ਜੇ ਪ੍ਰਸਾਦ ਸੁਗੰਦਰ ਲਾਵੇ ਤੁਨ ਹੈ ਸੁਗੰਧਤ ਨਹੀਂ ਜਾਈਦਾ ਸੁਗੰਧਤ ਸੁਗੰਧਤ ਤਾਂ ਲਾਣ ਦੇ ਨਾਲ ਹੈ ਲਾਮੇ ਕਿਵੇਂ ਆਦਾ ਸੁਗੰਧਤ ਆਈ ਦੀ ਸੁਗੰਧਤ ਖਰੀਦ ਹੈ ਸੁਗੰਧਤ ਕਰੀਂਦਾ ਸੁਬਤ ਲਾਈ ਦੀ ਸੁਗੰਧਤ ਕਰੀਦਾ ਕਿਸੇ ਚੀਜ਼ ਨੂੰ ਸੁਬਤ ਲਾ ਕੇ ਦੁਕਾਨ ਤੇ ਲਾਈ ਦੀ ਹੈ ਸੁਗੰਧ ਤੇ ਲਾਵਾਂ ਨਾ ਕਰਾਂ ਹੁੰਦਾ ਫਿਰ ਲਾਵਾਂ ਕਿਵੇਂ ਗਦਮ ਕਰੇ ਕੋਈ ਕਰੇ ਹੁੰਦਾ ਫਿਰ ਲਾਵਾਂ ਕਰੇ ਲਫ਼ਜ਼ ਗਲਤ ਲੱਗਿਆ ਹੈ ਸੁਗੰਧ ਤੇ ਲਾਵਾਂ ਦੁਕਾਨ ਤੇ ਲਾਵਾਂ ਜੈ ਪ੍ਰਸਾਦ ਸੁਗੰਧ ਤੇ ਲਾਵਾਂ ਵਰਤ ਤਾਂ ਵੈਸੇ ਹੀ ਲਾਵਤ ਨਹੀਂ ਹੋੜ ਜੈ ਲੱਗਦਾ ਬੋਲਣ दे ददे랄 ततारा दना हां जरा दद्दा तत्ता थत्ता दद्दा उसे ओदा दत्ता है उसे भक्तिदा तत्ता सुगंद, है जय प्रसाद सुगंध तम लावे सुगंध है सुगंधी लाउने आपा सुगंध का कोई शब्द नहीं मानता वैसे वैसे जर, आ, मतलब लफ्ज नहीं है ਜਿਸਕੋ ਸਿਮਰਤ ਪਰਮਗਤੀ ਪਾਵੇ ਸੁਗਲਤੀ ਹੈ ਵੈਸੇ ਸੁਗੰਧਤ ਕਰਨਾ ਹੁੰਦਾ ਹੈ ਕੋਣ ਨੂੰ ਸੁਗੰਧਤ ਕਰਤਾ ਉਹਦੀ ਲਾਤੀ ਮਤਲਬ ਹਾਂ ਸੁਗੰਧਤ ਨਾਲ ਲਾਉਣ ਜਿਸਕੋ ਸਿਮਰਤ ਪਰਮਗਤੀ ਪਾਵੇ ਜਿਸਕੋ ਸਿਮਰਤ ਪਰਮਗਤੀ ਉਹਦਾ ਤੈਨੂੰ ਪਤਾ ਚਿਤ ਆ ਜਾਵੇ ਸਮਝ ਆ ਜਾਵੇ ਉਹ ਕੌਣ ਹੈ ਫਿਰ ਤੂੰ ਸਮਝ ਲੋ ਜਿਹੜਾ ਹੈ ਨਾ ਉਹ ਕੋਈ ਜੰਦਾ ਉੱਥੇ ਪਾਪਰ ਦੇ ਫੜੇ ਬਾਹਰ ਹੀ ਨਿਕਲਦਾ ਫਿਰ ਉਹ ਪਾਪ ਤੋਂ ਬਾਹਰ ਨਿਕਲੇ ਪਰ ਪ੍ਰਤੀਭਾਲ ਨੇ ਫੇਰ ਤੇ ਵੀ ਰੁਕਾਵਟ ਦਿੱਤੀ ਇੱਕ ਐਸਾ ਗਿਆਨ ਹੈ ਸਾਡੇ ਕੋਲ ਉਹ ਤਾਂ ਬਾਹਰ ਹੀ ਨਿਕਲ ਰਿਹਾ ਸੰਤ ਦਾ ਜਿਹੜਾ ਗਿਆਨ ਹੈ ਉਹ ਇਤਰੇ ਕੋ ਬੜੀ ਸਾਰੀ ਇਹ ਦੱਸਦਾ ਉਹ ਦੇ ਵਿੱਚ ਹੀ ਕੋਈ ਲੱਗਦੀ ਹੈ ਕੋਈ ਤੇ ਪਾਪ ਦੇ ਬਾਹਰ ਵੀ ਨਿਕਲਦਾ ਕਿੰਨਾ ਜਰ ਪਾਪ ਦੇ ਬਾਹਰ ਵੀ ਨਿਕਲਦਾ ਕੋ ਨਾ ਜਰ ਪਰਮਾਤਮਾ ਜੇ ਨਾ ਤਾਂ ਸਮਝਦਾ ਮੈਂ ਕੁਝ ਕਰਦਾ ਕੋ ਨਾ ਜਰ ਸਰ ਕੋ ਜੋ ਉੱਥੇ ਫਿਰੂਗਾ ਹੀ ਫਿਰੂਗਾ ਪਰਚੋਂ ਬਾਹਰ ਨਹੀਂ ਨਿਕਲ ਸਕਦਾ ਜਾਨੇ ਮੈਂ ਕਰਦਾ ਇਹਦੀ ਸਭ ਚਾਗਾ ਮੈਂ ਨਹੀਂ ਕਰਦਾ ਫੇਰ ਪਰਬ੍ਰੁਤੀ ਹੋਗੀ ਫੇਰ ਇਹਦੀ ਕੋ ਰਖਾਉਂ ਦਰਾ ਜੇ ਸਿਮਰ ਤੋ परमगत की पावे समरथ जी थे भी समरथ लेके सत्ता लेके है इसको समर परमगत पावा ये भी गलत है इसको समर पावा देखो यात होता है इससे ਉਹ ਤੇ ਸਖੋ ਸਬਰ ਹੈ ਸਬਰੋ ਸਬਰ ਸਬਰ ਸੁਖਬਾਉ ਨਹੀਂ ਆਇਆ ਹੋਇਆ ਸਿਮਰਨ ਸਿਮਰਨ ਕਰਦਾ ਹੈ ਸਿਮਰਤ ਹੈ ਜਦ ਕਲਿਆ ਸਿਮਰਤ ਜਿਸ ਕੋ ਸਿਮਰ ਸਿਮਰਤ ਸਿਮਰ ਕਰਮਗਤੀ ਹਰ ਸਿਮਰਤ ਹਰ ਬਿਸਰਤ ਦਾ ਬਸ ਹਰ ਸਿਮਰਤ ਖਾਰਿ ਨਹੀਂ ਆ ਬਿਸਰਤ ਸਿਮਰਤ ਆਇਆ ਲਾ ਲਓ ਉਹ ਹੁੰਦਾ ਪਰ ਇੱਥੇ ਨਹੀਂ ਹਿਸਕਾਰ ਲੱਗੇ ਨਹੀਂ ਆਉਂਦਾ ਸਿੱਧਾ ਹੀ ਆਉਂਦਾ ਹਾਂ ਜਿਸ ਨੂੰ ਸਿਮਰਤ ਨਹੀਂ ਆਉਂਦਾ ਇਹਦਾ ਇਸ ਕੋਸਮਤ ਕਰਨਾ ਇਸ ਕੋਸਮਤ ਜੈ ਜੈ ਜੈ ਇਸ ਕੋਸਮਤ ਇਸ ਕੋਸ ਸਿਮਰ ਪਰਗਤੀ ਤੋਂ ਪਰਗਤੀ ਜੇ ਕੋ ਸਾਧ ਸੁਣਨ ਜਦ ਇਸ ਕੋਸ ਸਿਮਰ ਨਾਲ ਗੱਲ ਬਣਦੀ ਹੈ ਇਸ ਕੋ ਸਿਮਰਤ ਕਿਉਂਕਿ ਇਹ ਅਸੀ ਇਸ ਕੋ ਸਿਮਰ ਪਰਗਤੀ ਤੋਂ ਚਤਾਲ ਲੱਖ ਦੇ ਸਮਾਂ ਉਹ ਅਸੀਂ ਇੱਕ ਵਿਸਥੇਤਰ ਰਹਿ ਜਾਂਦੇ ਇੱਥੇ ਚ ਅਪਲਾਈ ਕਰ ਦਿੱਤੀ ਫਿਰ ਜਿਹੜੇ ਹੈ ਕਹਿੰਦੇ ਵਿਆਕਰਨ ਹਾਂ ਵਿਆਕਰਨ ਦਾ ਬਹੁਤ ਸਾਹਮਣਾ ਚਲਣੇ ਦੀ ਦੀ ਫਿਰ ਯਾ ਵਿਆਕਰਨ ਕਿਵੇਂ ਲੱਭੀਓ ਦੇਰ ਦੂਜੀ ਵਿਆਕਰਨ ਨਾਲ ਹਾਲ ਗੰਦੇ ਇਸ ਕੋ ਸਿਵਰਤ ਇਸ ਕੋ ਲਗੇ ਹਾਂ ਜੇ ਕੋ ਨਾ ਹੁੰਦਾ ਤੇ ਸਿਵਰਤ ਹੁੰਦਾ ਜਿਸ ਨੂੰ ਸੰਹਾਰਤ ਸੁਖ ਪਾਈ ਹੈ ਸਿਵਰਤ ਆਇਆ ਜਿਸ ਕੋ ਸਿਵਰਤ ਸੁਖ ਪਾਈ ਨਹੀਂ ਹੁੰਦਾ ਜਿਸ ਸਿਵਰਤ ਸੁਖ ਪਾਈ ਹੈ ਸਾਇ ਭਾਜਰੇ ਤਨ ਨੀਤ ਜਦ ਕੋ ਲੱਗ ਜੂ ਫਿਰ ਸਿਮਰਉਂਗਾ ਗੱਲ ਠੀਕ ਹੈ ਜੇ ਪ੍ਰਸਾਦ ਸੁਗੰਧ ਤਨ ਲਾਉਣਾ ਸੁਗੰਧ ਸੁਗੰਧ ਇਹਦੀ ਸੁਗੰਧ ਨਾਲ ਅਭੀਜਾ ਕਰ세 ਤਾਂ ਸੁਗੰਧ ਜੀ ਇਸ ਬਜਾਗ ਕੋਈ ਜਰੂਰੀ ਹੈ ਬਈ ਇਸ ਸ਼ੀਲਿੰਗ ਨੂੰ ਪੁੱਛਿਆ ਮੈਂ ਤਾਂ ਮੈਂ ਕਹੇ ਦੇਖੋ ਲਫਜ਼ ਹਾਂ ਦੇਖ ਲਫਜ਼ ਇਸ ਸ਼ੀਲਿੰਗ ਦਾ ਸੁਗੰਧ ਨੂੰ ਉਕੜ ਲਗੂਆ ਹੈ ਸ੍ਰੀਮ ਜੇ ਬਿਹਰੂ ਉਕੜ ਸੁਗੰਧੀ ਨਹੀਂ ਬੋਲਣਗੇ ਕੋਈ ਸੁਗੰਧ ਬੋਲਣ ਚਲ ਸੁਗੰਧੀ ਵੀ ਬੋਲੋ ਤਾਂ ਇਸ ਨੂੰ ਸੁਗਰਤੀ ਤਾਂ ਲਾਵੇ ਉਹ ਉਹ ਕਿਰਪਾ ਨਾਲ ਜਿਵੇਂ ਸ੍ਰੀਮ ਪੈਣਾ ਉਹਦਾ ਕਿਰਪਾ ਨਾਲ ਜੇ ਪ੍ਰਸੰਗ ਸੁਗੰਧ ਤੁਹਾਨੂੰ ਲਾਵੇ ਇਸ ਕੌਣ ਲਾਉਦਾ ਸੀ ਯੋਗੀ ਲਾਉਂਦਾ ਸੀ ਨਾ ਬਲ ਕੇ ਪੰਡਤ ਪੰਡਤ ਲਾਉਂਦਾ ਸੀ ਚੰਦਨ ਚੰਦਨ ਅਮਾ ਜੀ ਨਾ ਉਹ ਨੂੰ ਪਿਆ ਹੋਇਆ ਸ੍ਰੀ ਜਦ ਵੀ ਲਾਉਂਦਾ ਸੀ ਯੋਗੀ ਸਾਰੇ ਲਾਉਂਦੇ ਸੀ ਉਹ ਜਿਹੜੇ ਇਹ ਤਾਂ ਹੀ ਗੱਲ ਵੀ ਨਾ ਲਾਉ ਰਸੂਲ ਗੱਲ ਲਾਉਂਦੇ ਦੇ ਦੇਂ ਐਂ ਦੀ ਦਾ ਤੁਸੀਂ ਨਾਂ ਲਓ ਜੇ ਲਾਉਣਾ ਹੈ ਤਿਸ ਕੋ ਸਫਰ ਪਰਮਗਤੀ ਭਾਉ ਹੈ ਇੱਥੇ ਸਮਰਹਾ ਗਿਆ ਇੱਥੇ ਸਮਰਤ ਕਰ ਦਿਆ ਇੱਥੇ ਸਮਰਹਾ ਗਿਆ ਸਿਮਰਤ ਸੀਗਾ ਹੁਣ ਆਪਾਂ ਤੁਸੀਂ ਕਰ ਸਿਮਰਤ ਇਸ ਕੋ ਸਮਰਤ ਤੈਨੂੰ ਕਿ ਤੈਨੂੰ ਸਮਰਤ ਸੀਗਾ ਨਾ ਤੈਨੂੰ ਉਸ ਇਸ ਕੋ ਸਬਰ ਪਰਮਗਤੀ ਪਾਵੇ ਇਸ ਕੋ ਸਬਰ ਕੋਲ ਆ ਗਿਆ ਨਾ ਨਾ ਅਭੀ ਜੀ ਇਹਨੇ ਹੁ ਸਹੀ ਜਾਣੀ ਕਿ ਸਰਬ ਠੀਕ ਹੈ ਅਰਥੇ ਹੋ ਮੈਂ ਉਹਨੂੰ ਸਬਰ ਪਰਮਗਤੀ ਪਾਵੇ ਤੂੰ ਪਰਮਗਤੀ ਨੂੰ ਪ੍ਰਾਪਤ ਕਰ ਆਉ ਹੀ ਨਹੀਂ ਸਕਦਾ ਉਪਦੇਸ਼ ਉਪਦੇਸ਼ ਹੈ ਸਬੋਧਨ ਕੀਤਾ ਹੈ ਨਾ ਇਸ ਕੋ ਸੁਭਰ ਕੇ ਸੁਧਾਰ ਇਹ ਆਰਡਰ ਬਾਜਿਕ ਲਫਜ਼ਾ ਹੈ ਜਿਹਨੂੰ ਸਬੋਧਨ ਆ ਵੀ ਕਹਦੇ ਤੈਨੂੰ ਮਾ ਪ੍ਰਾਪਤੀ ਹੋ ਜੂਗਾ ਨਾ ਕਦੀ ਪਾਵਾਂ ਹਾਂ ਪਾਵਾਂ ਫਿਰ ਦੇਖ ਪਰਮਾਤੀ ਮਿਲਦੀ ਹੈ ਕਦੀ ਮਿਲਦੀ ਫਿਰ ਤੇਰਾ ਰਾਹ ਕੌਣ ਰੋਕਦਾ ਦੱਸੀ ਜੇ ਪ੍ਰਸਾਦ ਬਸੇ ਸੁਖ ਮੰਦਰ ਇਸੇ ਤੇ ਹੈ ਸਦਾ ਅੰਦਰ ਦੇਖੋ ਉਹਨਾਂ ਨੂੰ ਪੁੱਛਿਆ ਮਨ ਗੇ ਵੀ ਕਿ ਸੰਬੰਧੀ ਦੀ ਕਿਰਪਾ ਬੇਈ ਨਹੀਂ ਵੰਦੀ ਹੋਰ ਕੀ ਸੋਚਦੀ ਹੈ ਕੋਈ ਮਨ ਗੇ ਉਹਦੀ ਕਿਰਪਾ ਕੀ ਪਿੱਛੇ ਕੰਮ ਕਰਦੀ ਹੈ ਸੰਬੰਧੀ ਦੇ ਪਿੱਛੇ ਜੀ ਜਿਵੇਂ ਕਿ ਹੈ ਵੀ ਜਿਸਰ ਮਨ ਗੇ ਜੀ ਦੀ ਕਿਰਪਾ ਨਾਲ ਤੋਂ ਸੰਬੰਧ ਲਾ ਰਿਹਾ ਹਾਂ ਕਿ ਉਹਨੂੰ ਸਿਮਰ ਤੂੰ ਹਾਂ ਕਿ ਇਹ ਹੈ ਕਿ ਸੰਬੰਧੀ ਤੈਨੂੰ ਕਿਵੇਂ ਪ੍ਰਾਪਤ ਹੋਈ ਇਹ ਆ ਉਹਦੀ ਕਿਰਪਾ ਪਿੱਛੇ ਜਿਵੇਂ ਜੇ ਪਰਸਾਲ ਤੀਵੇਂ ਸ੍ਰੀ ਕਲ ਚਲਾ ਜੇ ਉਹ ਤਾਂ ਜਿਹੜਾ ਦਹੀ ਸਿਮਰ ਦਾ ਹਾਂ ਹੋਂ ਹੋ ਗਈ ਹੋਈ ਗੱਲ ਜਿਹੜਾ ਸਿਮਰਦਾ ਨਹੀਂ ਇਹ ਗੱਲ ਉਹਨੂੰ ਵਹੀ ਹੋਈ ਜਾਏ ਇਸ ਕਰਕੇ ਗਾਹਾਂ ਜਾੜ ਦੀ ਲੋੜ ਨਹੀਂ ਪਹਿਲਾਂ ਬਾਹਲਈ ਸੁਰ ਤੇ ਨੁਸਰਤੀ ਸਪਤਾ ਸਿਤਾ ਉੱਤਲੀ ਨੂੰ ਗਾਹਾਂ ਦੇ ਜਿਹੜੀ ਮੁਖਾਵ ਤਾਂ ਕਿ ਦੁਰਗਾ ਤੇ ਦੁਰੰਤੀ ਤਾਂ ਇਹ ਜਦ ਦਸੋਤੀ ਲੱਗੂਗੀ ਉਹ ਗਾਹਾਂ ਕਰਾਂਗੇ ਗੱਲ ਇੱਥੇ ਨਹੀਂ ਇੱਥੇ ਬਾਹਲਈ ਸੁਰ ਬਾਸਰੰਦੀ ਲਾਉਣ ਲੱਗੇ ਤਾਂ ਉਹ ਦੁਰਗਾ ਹੋ ਗਈ ਅੰਤਲੋਂ ਦੀ ਸਰੰਤੀ ਸਵਧੀ ਦਾ ਦਲੌੜੀ ਸੀ ਜੇਕਰ ਉਹਦੇ ਤੋਂ ਨਿਮਰਤਾ ਆ ਜਾਂਦੀ ਸਬੰਧੀ ਆਫੇ ਬਣ ਜਾਂਦੀ ਜੇਕਰ ਉਹਦੇ ਤੋਂ ਸ਼ਾਂਤੀ ਆ ਜਾਂਦੀ ਸਬੰਧੀ ਆਫੇ ਬਣ ਜਾਣੀ ਸੀ ਜੇ ਉਹਦੇ ਤੋਂ ਪ੍ਰੇਮ ਆ ਜਾਂਦਾ ਸਬੰਧੀ ਆਫੇ ਬਣ ਜਾਣੀ ਸੀ ਜੈ ਪਰਸਾਦ ਵਸੇ ਸੁਖ ਮੰਦਰ ਕਿਸੇ ਤੇ ਸਦਾ ਮਨ ਅੰਦਰ ਜੇ ਪ੍ਰਸਾਦ ਵਸੇ ਸੁਖ ਮੰਦਰ ਵਸੇ ਸੁਖ ਮੰਦਰ ਆ શરીર ਬੁੱਧਰੇ ਸਹੀ ਚਲੋ શરીર ਮੰਦਰ ਹੀ ਹੈ ਇਹਦੇ ਵਿੱਚ ਵਸਦਾ ਸੁਖ ਨਾਲ ਕਿਉਂਕਿ ਇਹਦਾ ਖਾਣਾ ਪੀਣਾ ਦੱਸਿਆ ਨਾ ਸਰੀਰ ਦਾ ਹੀ ਸత్యਮਤ ਵਗੈਰਾ ਇਹਦਾ ਨੂੰ ਦਿੱਤਾ ਹੋਇਆ ਬੁੱਧਰ ਬਣਾ ਕੇ ਮਾਇਆ ਦਾ ਇਹਦੇ ਵਿੱਚ ਜੇਦੀ ਕਿਰਪਾ ਨੂੰ ਵਸਦਾ ਜਿਸੇ ਤੇ ਆਏ ਸਦਾ ਮਨ ਮੰਦਰ ਉਹਨੂੰ ਮੰਨਦੇ ਮਨ ਮੰਦਰ ਦਾ ਦੱਸਿਆ ਉਹ ਦੱਸਿਆ ਬਾਹਲੇ ਮੰਦਰ ਨੂੰ ਛੱਡ ਕੇ ਧਿਆਨ ਲੱਗ ਮਨ ਬੁੱਧਰ ਦੇ ਵਿੱਚ ਧਿਆਨ ਮਨ ਮੰਦਰ ਦੇ ਵਿੱਚ ਉਹਨੂੰ ਲੱਭ ਉਤੇ ਜਿਸੇ ਸਦਾ ਮਨ ਮੰਦਰ ਸਦਾ ਇੱਥੇ ਕੰਪਾ ਲਾ ਕੇ ਤਾਂ ਚਲੀ ਆਏ ਸਦਾ ਉਹਦੇ ਸਦਾ ਧਿਆਨ ਲੱਗ ਜਿਹੜਾ ਕਿ ਬੁੱਧ ਦੇ ਉੱਤੇ ਆਏ ਹੋਊਗਾ ਜਿਵੇਂ ਸਦਾ ਮਨ ਉੰਦਰ ਸਦਾ ਦਲੇ ਨੂੰ ਜਿਵੇਂ ਤੇ ਆਏ ਸਦਾ ਸਦਾ ਉਹਦੇ ਧਿਆਨ ਰੱਖੋ ਮਨ ਉੰਦਰ ਮਨ ਉੰਦਰ ਨੜਕਾ ਬੁਜ ਤੇ ਉਦਾਰੇ ਇਹ ਹੋਣੇ ਤਾਂ ਹੋਣਾ ਗੱਲ ਮਨ ਉੰਦਰ ਦਾ ਮਤਲਬ ਕੁਝ ਹੋ ਰਿਹਾ ਹੂੰ ਹੂੰ ਕਰ ਸਕਦੇ ਤੁਸੀਂ ਸਦਾ ਤੇ ਆਏ ਇਹਦੇ ਵਿੱਚ ਸਾਥ ਸਾਥ ਤੇ ਹੁੰਦੇ ਵਿੱਚ ਸਦਾ ਤੱਕ ਕੋ ਬਲੂ ਆ ਕੇ ਮਨ ਅੰਦਰ ਹੈ ਉਹ ਕਿ ਤੇ ਤੇ ਆ ਬਰਦਰ ਮਨ ਮੰਤਰਾ ਦੇਖੋ ਪਰ ਵੀ ਮੰਤਰਾ ਤੇ ਉਹ ਉਥੇ ਹੈ ਤੇ ਹੁਣ ਉਹ ਉਥੇ ਹੈ ਤੂੰ ਮਹਜ਼ ਬਹਾਨੇ ਲਈ ਆ ਜਿਹੜਾ ਹੈ ਆਹ ਖੁਫੜੀ ਇੱਥੋਂ ਧਿਆਨ ਮੰਤਰਾ ਤੇ ਕੇ ਜਾਓ ਤੂੰ ਇੱਥੇ ਬਸਲ ਜੇ ਚਵਾਰੇ ਦੇ ਸਭ ਫਾਕੀਰ ਕੰਤ ਲੈ ਜਦ। ਇਹ ਜਵਾਰੇ ਵਾਸਾ ਹਾਂ। ਸਜੂ ਤਾਂ ਹੀ ਖਾਂ ਜੋ ਸਜੂ ਦੇ ਜਵਾਰੇ। ਦੋ ਕਰਨੇ ਲੋਕਾਂ ਨੇ ਚਾਰ ਦਰਵਾਜੇ ਨੇ ਤੇ। ਅਵਾ ਆਉਂਦੀ ਹੈ। ਹਾਂਜੀ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਗ੍ਰਹਿ ਸੰਗੀ। ਗਿਆ। ਆ ਸੁਖ ਬਸਣਾ। ਕਰ ਘਰ ਦੇ ਨਾਲ ਜਿਹੜੇ ਨਾਲ ਸੀ। ਤੇ ਤਬਰ ਪਰਿਵਾਰ ਨਾਨਕ ਨਾਲ ਅੱਥੀ ਜਿसे ਅਵਰਜੋਗ ਜਿਹਦੀ ਕਿਰਪਾ ਨਾਲ ਸਾਰੇ ਲੰਦ ਰਸ ਇਸ ਸੰਸਾਰ ਦੇ ਪਦਾਰਥ ਨੇ ਇਹ ਬਾਣਦਾ ਤੂੰ ਬੁੱਧ ਦੇ ਲੈਵਲ ਤੇ ਇਤਰੀ ਖੁਰਾਕ ਹੈ ਰੰਗ ਰਸ ਵੀ ਤਾਂ ਖੁਰਾਕ ਹੈ ਬੁੱਧ ਦੀ ਖੁਰਾਕ ਦੇ ਭੋਗਨ ਰਸ ਭੋਗ ਨਾਨਕ ਤੇ ਤੇ ਹੈ ਧਿਆਨ ਜੋ ਜਾ ਕਭ ਕਰਤੇ ਜੋਗ ਹੈ ਉਹ ਉਹੀ ਤੇ ਉੜ ਜੋਗ ਹੈ ਸਹੋਂ ਤੇ ਐਵੇਂ ਤੇ ਆਵਣ ਜੋ ਥੁਰ ਜਿੱਥੇ ਧਿਆਵਣ ਜੋਗ ਹੈ ਸਾਡੇ ਜਿੱਥੇ ਜਿੱਥੇ ਲੋਕ ਮਤਾਂ ਨੇ ਧਿਆਉਣ ਰੱਖਦੇ ਨੇ ਧਾਰਦੇ ਨੇ ਜਿਹਦਾ ਜਿਹਦਾ ਧਿਆਨ ਕਿਆ ਉਹਨਾਂ ਦੇ ਸ਼ਰਤਾਂ ਨੇ ਕਿ ਉਹਦੀ ਕਿਰਪਾ ਨਾਲ ਰੰਗਦਾ ਰਸ ਉਹ ਰੰਗਦਾ ਕਿ ਛਤੀ ਪਦਾਰਥ ਜਿਹੜੇ ਉਹਦੀ ਕਿਰਪਾ ਨਾਲ ਖਾ ਰਿਆ ਇਹ ਖਾ ਰਿਆ ਤਾਂ ਕੋ ਗੜਗੁੜ ਜਾ ਰਿਆ ਫਿਰ ਰੋੜੋ ਰੋੜੋ ਕੋਈ ਨਾ ਅੱਡੋ ਦੀ ਕਰਪਾਣੁ ਘਰ ਰਿਹਾ ਹੈ ਇਹ ਆਪੇ ਮੰਨਦਾ ਮੇਰੀ ਦੀ ਕਰਪਾਣੁ ਨਹੀਂ ਘਰ ਰਿਹਾ ਹੈ ਅਗਲੇ ਪਿੱਛੇ ਗੱਲ ਕੱਟ ਕੇ ਤੇ ਆਉਣ ਸਾਰੇ ਕੱਟ ਕੱਟਦੇ ਸਾਰੇ ਹੋਣ ਵਾਲਾ ਕੀ ਹੋਊਗਾ ਬਿਛੋ ਰਹੇ ਆ ਜਿੱਤੇ ਬਤਾਨੇ ਕੇ ਤਰੀਕੇ ਨਾਲ ਸਾਫ ਕਰ ਦਿੱਤੀ ਲੋ ਸਾਹੀ ਇਹ ਹੈ ਉਹ ਪਤਾ ਹੀ ਨਹੀਂ ਲੱਗਿਆ ਕਿ ਕਿਸ ਕੀ ਸਾਫ ਕਰੋ ਯੈਸ ਕਰੂੰਗੇ ਇਹਨੇ ਖੰਨਾ ਹਾਂ ਯੈਸ ਆ ਰਹੇ ਨੇ ਉਹ ਵਕੀਲ ਵਾਂਗੂ ਮਗਲ ਲਾ ਲਿਆ ਜਦੋਂ ਆ ਆ ਗਏ ਵਕੀਲ ਮੋਗਾ ਨਾ ਭਈ ਇਹ ਤਾਂ ਨਹੀਂ ਤਾਂ ਦੇਖਿਆ ਨਾ ਜੀ ਵਾਲਾ ਹਾਂ ਇਹ ਨਹੀਂ ਮੈਂ ਦੇਖਿਆ ਉਹ ਵੀ ਹਮ ਹੈ ਗਿਆ ਯਾਰ ਠੀਕ ਹੈ ਚਲੋ ਜੀ ਕੋਈ ਗੱਲ ਹੋ ਗਈ ਗੱਲ ਕੋਈ ਤੇ ਦੱਸ ਲੀ ਅਜੇ ਤੱਕ ਨਹੀਂ ਲੈ ਕੇ ਆਉਂਦੇ ਨੇ ਗੱਲ ਉਹ ਤਾਂ ਡਿਨਾਈ ਵੀ ਕਰ ਸਕਦਾ ਨਹੀਂ ਕਰਦਾ ਕੋਈ ਨਹੀਂ ਕਰਦਾ ਭਾਈ ਇਹ ਯਸ ਕਰਦਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਅੰਗੇ ਧਿਆਵਣ ਜੋਗ ਜੈ ਪ੍ਰਸਾਦ ਰੰਗ ਰਸ ਭੋਗ ਜੀ ਦੇ ਰੰਗ ਰਸ ਹਾਰੇ ਨੇ ਜਿਹੜੇ ਦੁਨੀਆ ਦੇ ਉਹ ਤਾਂ ਨਾ ਤੁਹ ਨਾ ਅਨਿਕ ਸਦਾ ਤੇ ਹਯਤ ਹੈ ਹਮਲ ਜੋਗ ਧਾਰਨ ਕਰ ਲੈ ਫਿਰ ਉਦੈ ਚਾਰਨ ਕਰ ਜੇ ਇਦਾਂ ਕੋ ਦਿੱਤਾ ਹੈ ਨੂਲ ਕੋਸ਼ੋ ਸਸੇ ਸੇ ਤਿਆਗ ਅਪਰ ਸੰਤ ਰਚਨ ਅੱਗੇ ਆਉਂਦਾ ਦੋ ਖੂੜਾ ਤਾਂ ਵਿਆਪਾ ਚਾਨ ਗੱਲ ਲੋ ਪ੍ਰਭਾਪਰ ਵਾਹੀ ਵੀ ਆਉਂਗਾ ਕੀ ਹੈ ਨਹੀਂ ਦੁਸੇ ਆਪੀ ਹੋ ਜੋ ਹਾਂ ਹਾਂਾਰੇ ਤੇ ਆਨੋ ਹੋ ਗਏ